ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਸੱਜਣ ਸੱਚਾ ਪਾਪਾ ਸੱਜਾ ਸੱਜਣ ਆਉਤ ਮੇਰਾਉ ਤਾਂ ਪਾਪਛਰ ਉਹਨੂੰ ਕੋਖ ਨਹੀਂ ਹੈ ਤਨੇ ਕੋਈ ਵੀ ਸਿਰ ਸ਼ਾਹ ਦੇਸ਼ਾ ਜਿਹਨੇ ਵੀ ਗਿਆਨ ਕਰਨ ਵਾਲੇ ਚਾਹ ਨੇ ਗਿਆਨ ਦੇਣ ਵਾਲੇ ਉਹਨਾਂ ਸਾਰਿਆਂ ਦੇ ਪੁੱਤੇ ਆ ਉਹਦੇ ਲੈ ਕੇ ਦਿੰਦੇ ਨੇ ਜਿਸ ਪਾਸ ਬੈਠਿਆ ਸੋਹੀ ਹੈ ਉਹਦੇ ਜੇ ਕੋਲ ਬੈਜੀਏ ਤਾਂ ਸੋਹਣੇ ਲੱਗਦਾ ਹੈ ਕਲੰਕ ਨਹੀਂ ਰਹਿੰਦਾ ਉਹਦੇ ਕੋਲ ਬੈਠਿਆਂ ਸਭਨਾ ਦਾ ਵੇਸ਼ ਸਭ ਸਾਰਿਆਂ ਨੂੰ ਜਾਣ ਬਣਨ ਵਾਲਾ ਗੁਣਮੰਤਾ ਨੂੰ ਗੁਣ ਦੇਣ ਵਾਲਾ ਅਗਣ ਆਿਆਂ ਨੂੰ ਗੁਣਮੰਤੇ ਕਰਨ ਵਾਲਾ ਐਸਾ ਵੀ ਦੁਨੀਆਂ ਦੇ ਜੀਵੋ ਗਿਆਨ ਦੇਣ ਵਾਲਾ ਨਹੀਂ ਹੈ ਸਭ ਨੂੰ ਜਾਣ ਦੇਣ ਵਾਲਾ ਕਿਦਾ ਵੀ ਕੋਈ ਗਿਆਨ ਹੋਵੇ ਗੁਣਾਂ ਹੋਵੇ ਸਾਰਿਆਂ ਨੂੰ ਗੁਣ ਹੋਰ ਗਿਆਨ ਵਰਨਣ ਵਾਲਾ ਸਿਦਸ਼ਾਹ ਅੰਦਰ ਚਾ ਅੱਛਾ ਇਹ ਚਿੱਤ ਦੀ ਗੱਲ ਹੋ ਰਹੀ ਹੈ ਪਰਮੇਸ਼ਰ ਦੀ ਗੱਲ ਹੋ ਸੱਚਾ ਪਾਤਸ਼ਾਹ ਫਤਗੁਰਾਹ ਸਿੱਖ ਜਿਹੜਾ ਇਹ ਗਿਆ ਉਹ ਐਸਾ ਜਿਹੜਾ ਸੱਚਾ ਪਾਤਸ਼ਾਹ ਕੱਲਾ ਜਿੱਤ ਨਹੀਂ ਹੈ ਹੁਣ ਸਾਬਤ ਸੂਰਤ ਠੀਕ ਹੈ ਜੀ ਪੂਰਨ ਬ੍ਰਹਮ ਹੈ ਜੀ ਆ ਪੂਰਨ ਰਬ ਹੈ ਅੱਛਾ ਸਿਦਸ਼ਾਹ ਦਾ ਸ਼ਾਹ ਉਹ ਸਾਰੇ ਸ਼ਾਹਾਂ ਦਾ ਸ਼ਾਹ ਹੈ ਤੇ ਲੋਕ ਦਾ ਗਿਆਨ ਹੈ ਦੇਖੋ ਠੀਕ ਹੈ ਨਾਲੇ ਉਹ ਜਿਹੜਾ ਸ਼ਬਦ ਦੇ ਰਿਹਾ ਸ਼ਬਦ ਅਖੁੱਟ ਬਾਬਾ ਉਹ ਸ਼ਬਦ ਲਿਆ ਕੇ ਦੇ ਰਿਹਾ ਹਾਂ ਜੀ ਉਹ ਕਿਹੜਾ ਉਹ ਤੋਂ ਕੋਈ ਨਹੀਂ ਜੋ ਮੰਗੇ ਠਾਕਰ ਆਪਣੇ ਦਸੂਰ ਸੂਰ ਦੇ ਵਜੇ ਇਹ ਤਾਂ ਹੁੰਦਾ ਤੁਸਤਾ ਉਹ ਹੋਰ ਖੋਲ ਦੇ ਕੇ ਤਾਂ ਉਹਨੇ ਪਰਮੇਸ਼ਰ ਤੋਂ ਠੀਕ ਹੈ ਜੀ ਜਿਸ ਪਾਸ ਬੈਠਿਆ ਸੋਹੀ ਹੈ ਹੁਣ ਬਹਿਣਾ ਕਿੰਨਿਆ ਜੀ ਇਹਨਾਂ ਦੇ ਪਾਸ ਇਹ ਬੁੱਧੀ ਨੇ ਬਹਿਣਾ ਬਾਦ ਅੱਛਾ ਜੀ ਸਬਨਾ ਦਾ ਵੇਸਾ ਵਿਸਾ ਨੂੰ ਇਹ ਵਿਸ਼ਵਾਸ ਪਾਤਰ ਨਹੀਂ ਦਾ ਛਾਏ ਹੋ ਵੇਲ ਆਗਾ ਛਾਹ ਲੱਗ ਅੱਛਾ ਸਬਨਾ ਦਾ ਵੇਸ਼ ਗੁਰੂ ਉਕੜ ਵੀ ਹੈ ਦੇਖੋ ਜੀ सबना ਦਾ ਇਹ ਇੱਥੇ ਤੋੜ ਕੇ ਪੜਨਾ ਜੀ ਸਬਨਾ ਦਾ ਵੇਸਾ ਵੀ ਉਹਨਾਂ ਦਾ ਚਾਹੇ ਉਹ ਠੀਕ ਹੈ ਇਹਨਾਂ ਨੇ ਵੇਸਾ ਇੱਕ ਵਰਡ ਕਰ ਲਿਆ ਤੇ ਇਹ ਵੀ ਵਿਸਾਰ ਇਸੇ ਸਿਰ ਤੇ ਉਸ ਦੇ ਅਰਥ ਕਰਦੇ ਆ ਨਹੀਂ ਨਹੀਂ ਉਹਦਾ ਭਰੋਸਾ ਤਾਂ ਕੋਈ ਕਰਦਾ ਹੀ ਨਹੀਂ ਗੁਰਬਾਣੀ ਦੇ ਗੁਰੂ ਮੁਕੀ ਹੋਵੇ ਸੋ ਅਲਿਪਤ ਵਰਤੇ ਮਨਮੁਖ ਕਾ ਕਿਆ ਵੇਸਾ ਹੈ ਇੱਥੇ ਫਿਰ ਭਰੋਸਾ ਅੱਛਾ ਤੇ ਇਹਦੇ ਅਰਥ ਭਰੋਸਾ ਵੀ ਹੋ ਸਕਦੇ ਆ ਤੇ ਜੇ ਇਹਨੂੰ ਆਪ ਤੋੜ ਲਈਏ ਸਾਹ ਵੀ ਹੋ ਸਕਦੇ ਸਭਨਾ ਦਾ ਵੇਸਾ ਕਿਉਂਕਿ ਵੇ ਸ਼ਬਦ ਵੀ ਆਉਂਦਾ ਹੈ ਨਾ ਮਨ ਪਰਦੇਸੀ ਵੇ ਸੰਸਾਰ ਦੇ ਸਾਹ ਆ ਗਿਆ ਨਾ ਉਹ ਤਾਂ ਕਰਕੇ ਵੇਸ਼ਾ ਹੈ ਸਭਨਾ ਦਾ हां जी वे शब्द आंदा जी ਕਾafi ਵਾਰ ਆਉਂਦਾ ਮੇਰੇ ਮਨ ਪਰਦੇ ਵੇ ਸੋ ਵੇ ਜੀਆ ਆਪਣਾ ਕੀਆ ਮਤ ਪਿੱਟੇ ਵੇ ਮਤ ਪਿੱਟੇ ਸੋ ਇਹਨੂੰ ਆਪਾਂ ਤੋੜ ਕੇ ਵੜਾਂਗੇ ਠੀਕ ਹੈ ਜੀ ਇੱਥੇ 22 22 ਨੰਬਰ ਸ਼ਲੋਕ ਦੀ ਤੇ 12 ਤੇ ਵਧੇਕ ਮਹਾਰਲਾ ਪੰਜਵਾਂ ਦੇ ਸ਼ਲੋਕਾਂ ਦੀ ਸਮਾਪਤੀ ਹੈ ਜੀ ਇਸ ਤੋਂ ਬਾਅਦ ਹੁਣ 57 ਸ਼ਲੋਕ ਹੈ ਨੌਵੇਂ ਪਾਦਸ਼ਰੇ ਆਪਾਂ ਉਹ ਸ਼ੁਰੂ ਕਰਾਂਗੇ